ਸ਼ਲੋਕ ਮਹੱਲਾ ਤੀਜਾ ਵਿਣ ਸਤਗੁਰ ਸੇਵੇ ਸੁਖ ਨਹੀ ਮਰ ਜਮੈ ਵਾਰ ਮੋਠ ਗੋਲੀ ਪਾਇਨ ਬਹੁ ਦੂਜੇ ਭਾਏ ਵਿਕਾਰ ਮੈਨ ਸਤਗੁਰ ਸੇਵੇ ਸੁਖ ਨਹੀਂ ਸਤਗੁਰ ਦੀ ਸੇਵਾ ਹੈ ਤਾਂ ਔਖੀ ਪਰ ਇਹਤੇ ਬਿਨਾਂ ਸੁਖ ਵੀ ਹੈ ਜੀ ਸ਼ਬਦ ਵਿਚਾਰ ਤੇ ਬਿਨਾਂ ਸੁਖ ਵੀ ਹੈ ਜੀ ਗੁਰਬਾਣੀ ਦੇ ਵਿਚਾਰ ਤੋਂ ਬਿਨਾਂ ਹਮੇ ਤੋਂ ਬਿਨਾਂ ਸੁਖ ਨਹੀਂ ਮਿਲਣਾ ਬੰਦੇ ਤੋਂ ਬਿਨਾਂ ਗੱਲ ਵੰਡੀ ਨਹੀਂ ਸੁਖ ਨਹੀਂ ਪਰ ਜਦ ਮੈਂ बारो बारो बारो बार ਜਮਨਾ ਮਰਦਾ ਰਹੇਗਾ ਜਮਨੇ ਮਰਦੇ ਰਹੇ ਨੇ ਇਹ ਪਪ ਸਾਗਰ ਦੇ ਵਿੱਚ ਗੋਤੇ ਖਾ ਰਹੇ ਨੇ ਜਿਹੜਾ ਗੁਰਬਾਣੀ ਦੀ ਸਤਗੁਰ ਦੀ ਸੇਵਾ ਕਰ ਲੂਗਾ ਉਹ ਬਚੂਗਾ ਵਰਨਾ ਬਚਾ ਕੋਈ ਨਹੀਂ ਹੈ ਮੋਟ ਔਲੀ ਪਾਇਨ ਉਹ ਮੋ ਮਾਇਆ 'ਚ ਫਸੇ ਨੇ ਉਹ ਨਹੀਂ ਛੱਡ ਦੁੱਤਾ ਉਹ ਵੀ ਛੱਡਦਾ ਆਇਨ ਬਹੁ ਦੂਜੇ ਭਾਏ ਵਿਕਾਰ ਇਹ ਦੂਜੇ ਭਾਏ ਮਾਇਆ ਦੇ ਆਇਆ ਦੇ ਜਿਹੜੇ ਇੱਛਾਵਾਂ ਨੇ ਇਹਦੇ ਬਕਾਰਾਂ ਚ ਲੋਭ ਦੇ ਬਕਾਰਾਂ ਚ ਰਕਾਰ ਦੇ ਬਕਾਰਾਂ ਚ ਇਹਨਾਂ ਕਰਕੇ ਵੀ ਛੱਡ ਦਿੱਤੇ ਸਮਝ ਨਹੀਂ ਰਿਹਾ ਇਹਦੇ ਕਰਕੇ ਸੁੱਖ ਲਿਆ ਇਹ ਨੂੰ ਦੁੱਖੇ ਦੁੱਖ ਹੈ ਇਹਨਾਂ ਵਿੱਚ ਦੁੱਖ ਹੈ ਇਹਨਾਂ ਨੂੰ ਛੱਡਦਾ ਦੀ ਕੁਰਬਾਨੀ ਛਣਾਉਂਦੀ ਹੈ ਛੱਡਦਾ ਦੀ ਇਸ ਕਰਕੇ ਸੁਖ ਹੋ ਦੀ ਸਭ ਠੀਕ ਹੈ ਜੀ ਹਾਂ ਬਿਨ ਸਤਗੁਰ ਸੇਵੇ ਸੁਖ ਨਹੀਂ ਦਾ ਭਾਵ ਹੈ ਬਿਨ ਸਤਗੁਰ ਸਤਗੁਰ ਦੀ ਸੇਵ ਤੋਂ ਬਿਨਾ ਸੁਖ ਸਾਗਰ ਤੇ ਨਿਵਾਸ ਨਹੀਂ ਹੋ ਸਕਦਾ ਸੁਖ ਸਾਗਰ ਦੇ ਨਿਵਾਸ ਤਾਂ ਦੇਖਿਆ ਥੋੜਾ ਜਿਹਾ ਸੁਖ ਵੀ ਨਹੀਂ ਦੇਖਿਆ ਸੁਖਾੜੀ ਹਵਾਵ ਨਹੀਂ ਮਾੜੀ ਕਾਲੀ ਥੋੜੀ ਜੀ ਆਪਾਂ ਲਾ ਗਈ ਫਿਰ ਤਾਂ ਉਧਰ ਨੂੰ ਭਜੂਗਾ ਲੱਗੋ ਵੀ ਜੀ ਹਵਾ ਦੀ ਕਿਤੇ ਦੇਖੀ ਇਧਰ ਸੁਖ ਤੋਂ ਸੁਖ ਸਾਗਰ ਦਾ ਹੀ ਭਾਵ ਹੈ ਜੀ ਹਾਂ ਜੀ ਤੂੰ ਕੀ ਵੀ ਔਕਰ ਨਾਲ ਲਿਖਿਆ ਨਾ ਸੁਖ ਦਾ ਮਤਲਬ ਪਰ ਸੁਖ ਹੈ ਉਹ ਹੈ ਸੁਖ ਸਾਗਰ ਚ ਇਹ ਤੋਂ ਵੱਡਾ ਕੋਈ ਸੁਖ ਹੈ ਨਹੀਂ ਹਾਂਜੀ ਇੱਕ ਗੁਰ ਪ੍ਰਸਾਦੀ ਉੱਭਰੇ ਤਿਸ ਜਨ ਕੋ ਕਰੈ ਸਭ ਨਮਸਕਾਰ ਨਾਨਕ ਅੰਨ ਨਾਮ ਧਿਆਇ ਤੂੰ ਅੰਤਰ ਜਿਤ ਪਾਵੈ ਦੁਆਰ ਇੱਕ ਗੁਰ ਪ੍ਰਸਾਦੀ ਉੱਭਰੇ ਜਿਹੜੇ ਨਾਲ ਜਿਹੜੇ ਉੱਪਰ ਆ ਗਏ ਲੈ ਲੈ ਗੁਰਮਤਿ ਗਿਆਨ ਸਮਝ ਗਿਆ ਮਾਇਆ ਦੇ ਬਹੁਤ ਉੱਪਰ ਉੱਠ ਖੜੇ ਹੈ ਮਾਇਆ ਦੀ ਥੋੜੀ ਤੋਂ ਉੱਪਰ ਉੱਠ ਖੜੇ ਜਿਹਨਾਂ ਠੱਗ ਪਹਿਚਾਨ ਲਿਆ ਗਈ ਥੰਦੌਰੀ ਤੇ ਜਾਂ ਠੱਗ ਪਹਿਚਾਨ ਲਿਆ ਤਿਸ ਜਨ ਕੋ ਕਰਾਂ ਸਭ ਦੁਸ਼ਕਾਰ ਉਹ ਐਸਾ ਜੇ ਕੋਈ ਆਦਮੀ ਹੈ ਹੋ ਜਾਂਦਾ ਹੁੰਦੇ ਨੇ ਭਗਤ ਹੁੰਦੇ ਆਏ ਨੇ ਆ ਬਾਣੀ ਸਾਰੀ ਹੋ ਹੁੰਦੇ ਆਏ ਨੇ ਇਦੋਂ ਥੋੜੀ ਅਵਸਥਾ ਦੇ ਵੀ ਆਦਮੀ ਹੁੰਦੇ ਆਏ ਨੇ ਉਹਨਾਂ ਨੂੰ ਵੀ ਲੋਕ ਨਮਸਕਾਰ ਕਰਦੇ ਨੇ ਅਗਲੇ ਗੱਲ ਵਿੱਚ ਇਹ ਜੀ ਅਵਸਥਾ ਚਲੇ ਜਾਣਗੇ ਕੋਈ ਨਹੀਂ ਉਹਨਾਂ ਨੂੰ ਸਾਰਿਆਂ ਨਮਸਕਾਰ ਕਰਦੇ ਨੇ ਜਿਹੜੇ ਸੁਖੀ ਹੋ ਜਾਂਦੇ ਨੇ ਕੈ ਸੱਤ ਸੱਤ ਤੋਖ ਵੀ ਇਦਰੀ ਹੁੰਦਾ ਤਾਂ ਵੀ ਲੋਕ ਤੁਹਾਨੂੰ ਨਮਸਕਾਰ ਕਰਨ ਲੱਗ ਜਾਂਦੇ ਨੇ ਹੋਵੇ ਤਾਂ ਸਹੀ ਕੋਈ ਨਾਨਕ ਆਨਦੇ ਤੂੰ ਨਾਨਕ ਆਨੰਦ ਰੂਪ ਧਿਆਇ ਤੂੰ ਤਾਂ ਤੂੰ ਵੀ ਇਦਨ ਰਾਤ ਨਾਮ ਦੇ ਵਿੱਚ ਧਿਆਨ ਲੱਖ ਸ਼ਬਦ ਵਿਚਾਰ ਕੇ ਧਿਆਨ ਰੱਖ ਤਰੇ ਜਿਵੇਂ ਮੁਖ ਦਵਾਰ ਤੱਕ ਜਾਣਾ ਉਹ ਅੰਦਰ ਇਹ ਮੋਖ ਦਵਾਰ ਹੈ ਬਾਹਰ ਮੋਖ ਦਵਾਰ ਨਹੀਂ ਕਿਤੇ ਹੈਗਾ ਕਹਾਂ ਵੀ ਉਹ ਮੋਖ ਦਵਾਰ ਅੰਤਰੀ ਆਪਣੇ ਅੰਤਰੀ ਭੁਖੀ ਆ ਅੰਤਰੀ ਦਵਾਰ ਅੰਤਰੀ ਸਭ ਕੁਝ ਹੈ ਠੀਕ ਹੈ ਜੀ ਅੰਤਰ ਦੇਰ ਦੀਪਕ ਲੱਗਦਾ ਇੱਥੇ ਹੈ ਜੀ ਹਾਂ ਹਾਂ ਨਾਨਕ ਆnde ਨਾਮ ਤੇ ਤੂੰ ਅੰਤਰ ਅੰਤਰ ਜਿੱਤ ਪਾਵੇ ਮੋਖ ਦਵਾਰ ਅੰਦਰੇ ਜਿੱਥੇ ਤੇ ਉੱਥੇ ਹੀ ਪਾ ਲੈਣਾ ਦੇਰੀ ਹੋ ਗਿਆ ਠੀਕ ਜਿੱਥੇ ਧਿਆਉਣਾ ਉੱਥੇ ਧਿਆਉਣਾ ਜਾਣਾ ਖਤਮ ਹੋ ਗਿਆ ਜਾਂ ਆਉਣਾ ਜਾਣਾ ਖਤਮ ਹੋ ਗਿਆ ਉੱਥੇ ਪਾ ਲਿਆ ਠੀਕ ਹੈ ਇੱਥੇ ਹੁਣ ਮੋਖ ਦੁਆਰ ਦਿਓ ਸ਼ਬਦ ਲਿਖਿਆ ਪਰ ਜਪਜੀ ਸਾਹਿਬ ਚ ਲਿਖਿਆ ਉੱਥੇ ਔਂਕੜ ਲਾਇਆ ਉਹ ਸਿਰਫ ਉੱਥੇ ਹੀ ਲਿਖਿਆ ਹੋਰ ਕਿਤੇ ਮੋਖ ਦੁਆਰਾਂ ਔਂਕੜ ਨਾਲ ਨਹੀਂ ਲਿਖਿਆ ਹਾਂਜੀ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਸਚ ਮਰਣਾ ਹਰ ਧੰਦਾ ਕਰਪਿਆਂ ਜਨਮ ਗਿਆ ਅੰਦਰ ਦੁੱਖ ਸਹਾਮ ਮਾੜਾ ਨਾ ਬੜਾ ਭਲੇਖਾ ਕਰਤਾ ਮਰਤਾ ਜਗ ਬੂਹਾ ਮਨ ਪੀਣਾ ਕੋਈ ਸਿਰ ਛੱਡੀ ਜਾਣੇ ਨੂੰ ਮਾੜਾ ਬੱਦੀ ਜਾਂਦੇ ਨੇ ਮਾੜਾ ਨਹੀਂ ਹੈ ਸੱਚ ਮਾਰਨਾ ਕੀ ਹੈ ਮਾਇਆ ਹੋ ਬਿਸਾਰਿਆ ਜੇ ਮਾਇਆ ਹੋ ਬਿਸਰ ਗਿਆ ਨਾ ਸੱਚ ਮਾਰਨਾ ਇਹ ਸੱਚ ਮਾਰਨਾ ਕਾਹਦੇ ਨਾ ਹਰਨਾਮ ਹਰਨਾਮ ਤੇ ਵੀ ਲੋਹੀ ਬੋਲ ਸਕਦਾ ਆਪ ਤੇ ਬਣਾ ਨਹੀਂ ਮਨ ਪਰਦਾ ਉਹ ਮਾਨਤਾ ਕੀ ਮੰਨਦਾ ਬੰਦੀ ਜਹਰ ਮੰਦੀ ਆ ਇਹ ਤੇ ਔਗਣ ਮੰਨ ਲੈਣੇ ਵਕਾਰ ਮੰਨ ਲੈਣੇ ਮਨ ਦਾ ਸੁਭਾਅ ਮੰਨ ਲੈਣਾ ਜਿਹੜਾ ਉਲਟਾ ਸੁਭਾਅ ਹੈ ਦਾ ਟਕਰਾਉਣ ਵਾਲਾ ਸੁਭਾਅ ਹੈ ਦਾ ਹੰਕਾਰ ਮੰਨਦਾ ਉਹ ਮੰਨਦਾ ਹੋਰ ਮੰਨਦਾ ਕੀ ਮੰਨਦਾ ਇਹ ਸੱਚ ਮੰਨਦਾ ਸੱਚ ਨਾਲ ਮਰੂਗਾ ਝੂਠ ਅੱਦਾ ਕਰਤਿਆਂ ਜਨੂ ਬਵਾਇਆ ਅੰਦਰ ਦੁੱਖ ਸਾਮ ਆ ਜਿਹੜਾ ਬਾਇਆ ਦੇ ਧੰਦੇ ਚ ਕੂੜ ਦੇ ਧੰਦੇ ਲੱਗਿਆ ਆ ਨਾ ਇਹ ਧਰਮ ਦਾ ਆਰਡ ਕਰਕੇ ਵੀ ਦੇਖੋ ਧਰਮ ਦਾ ਆਰਡ ਕਰਕੇ ਜਿਹੜਾ ਲੱਗਿਆ ਉਹ ਨੂੰ ਕਿ ਹੈ ਤੱਦਾ ਜਿਹੜੇ ਲੋਕ ਕਰਦੇ ਨੇ ਤੱਦਾ ਉਹ ਤਾਂ ਤੱਦਾ ਉਹ ਤਾਂ ਵਿਚਾਰੇ ਉਦਾਂ ਹੀ ਉਹ ਤਾਂ ਦੋ ਧਾਰਮਿਕ ਲੈਵਲ ਧਰਮ ਦਾ ਕਰਦਾ ਹੈ ਇਕੱਠੀ ਉਹ ਤੱਦਾ ਕਰਤੇ ਜਨਮ ਗਵਾਇਆ ਉਹਨਾਂ ਨੇ ਜਨਮ ਵਾ ਲਿਆ ਉੱਤਰ ਦੁੱਖ ਸਾੰਭ ਅੰਦਰ ਦੁੱਖ ਹੈ ਬਾਹਰੋਂ ਦੁੱਖ ਜਹਲ ਨਹੀਂ ਕਰਦੇ ਉੱਤਰ ਦੁੱਖ ਚਾਉਂਦੇ ਨੇ ਪਰੇਸ਼ਾਨ ਬਹੁਤ ਨੇ ਤਰੋ ਲੇਗ ਅਨੰਦ ਦਾ ਤਾਂ ਫਿਰ ਉੱਤੋਂ ਬਾਹਰ ਉਹਨਾਂ ਦਾ ਆਨੰਦ ਕਰਦੇ ਨੇ ਜाहिर ਆਨੰਦ ਕਰਦੇ ਨੇ ਉਹ ਜਾਂ ਕਰਦੇ ਨੇ ਇਹ ਉਹ ਉੱਤੋਂ ਕੋਈ ਅੰਦਰ ਹਾਲਤ ਜਿਨ ਪੂਰਬ ਲਿਖਿਆ ਕਰਾਮ ਸਾਨਾ ਗੰਨ ਸਤਿਗੁਰ ਦੀ ਸੇਵਾ ਤੋਂ ਸੁਖ ਪਾਇਆ ਜਿਨੇ ਵੀ ਪਾਇਆ ਕਿਹਨੇ ਪਾਇਆ ਜਿਨ ਪੂਰਬ ਲਿਖਿਆ ਕਰਾਮ ਲੇਕੇ ਤਾਂ ਸਾਰੇ ਲਿਆਏ ਤੇ ਕੋਈ ਅੱਜ ਜੱਲਾ ਨੇ ਲੇਖੇ ਲਿਆਇਆ ਤਾਂ ਕੋਈ ਲਿਖਤਾ ਲਿਆਇਆ ਤਾਂ ਵੀ ਪਾਇ ਸਾਡੀ ਹੋਊ ਗੱਲ ਤਰੀ ਹੋ ਪਰ ਇਹ ਆ ਲੇਖੇ ਲਿਆਸੀ ਪੂਰੀ ਤਸੱਲੀ ਨਾਲ ਵੀ ਆਇਤੀ ਜਦੋਂ ਬੋਲਦੀ ਲਕੀਰ ਹੈ ਜਿਹੜੀ ਉਹ ਵਟਾ ਦੇਣੀ ਹਾਂਜੀ ਪੜੀ ਲਿਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੈ ਕੋਈ ਹਰ ਦਰ ਸੱਦ ਢੋਈ ਇਹ ਲੇਖਾ ਪੜਨਾ ਹੈ ਹਰ ਰੂਪ ਦਾ ਲੇਖਾ ਪੜੋ ਆ ਲਿਖਿਆ ਹੋਇਆ ਗੁਰਬਾਣੀ ਲਿਖੀ ਹੋਈ ਹੈ ਇਹਨੂੰ ਪੜ ਲਓ ਉਹ ਲੇਖਾ ਜੀ ਪੜੋ ਲੇਖਾ ਪੜੀਏ ਹਰ ਫਿਰ ਲੇਖ ਨਾ ਹੋਈ ਫਿਰ ਆਪ ਆ ਜਿਹੜਾ ਹੈ ਨਾ ਸਿੱਧਾ ਲੇਖਾ ਲਿਖਦਾ ਹੈ ਮੈਂ ਆ ਕੀਤਾ ਮੈਂ ਉਹ ਕੀਤਾ ਜੇ ਪੁੱਤ ਕੀਤਾ ਮੈਂ ਪਾਪ ਕੀਤਾ ਇਹ ਲੇਖਾ ਛੁੱਟ ਜਾਊਗਾ ਫਿਰ ਸਹੀ ਲਿਖ ਰਾਇਆ ਹੈ ਫਿਰ ਉਹਨੂੰ ਸਮਝ ਆ ਗੁਰਬਾਣੀ ਕੀ ਕਹਿੰਦੀ ਹੈ ਪੁੱਛੇ ਨਾ ਸਕੇ ਕੋਈ ਹਰਦਲ ਫੱਟ ਢੋਈ ਉਹ ਨੂੰ ਨਹੀਂ ਫਿਰ ਕੋਈ ਲੇਖਾ ਪੁੱਛਦਾ ਹਰਦਲ ਦਾ ਢੋਈ ਬੜ ਜਾਂਦੀਆਂ ਉਹ ਨੂੰ ਹਰਦਲ ਦਾ ਜੀ ਨੂੰ ਢੋਈ ਆ ਜੇ ਹਰਦਲ ਦਾ ਜੀ ਦੀ ਮਰਜ਼ੀ ਤੇ ਖੜੀ ਹੈ ਦਰਗਾਹ ਜੀ ਦੀ ਫਤਗਣ ਸਾਰਾ ਜੀ ਦੀ ਮਰਜ਼ੀ ਤੇ ਖੜਾ ਹੈ ਉਹਦਾ ਲੇਖਾ ਪਾਣ ਪੁੱਛੂਗਾ ਉਹਦਾ ਨਹੀਂ ਕੋਈ ਲੇਖਾ ਪੁੱਛ ਸਕਦਾ ਉਹ ਕਿਸੇ ਹੋਰ ਢੋਈ ਦੀ ਲੋੜ ਵੀ ਹੈ ਜੀ ਇੱਥੇ ਲੇਖਾ ਦਾ ਭਾਵ ਹੈ ਵੀ ਲਿਖਿਆ ਲਿਖਿਆ ਹੋਇਆ ਕੋਈ ਜੇ ਪੜਨਾ ਹੋਵੇ हां दोवे कुछ ਲਿਖਿਆ ਹੋਇਆ ਲਿਖਿਆ ਹੋਇਆ ਹੀ ਆਪਣੀ ਕੋਲ ਠੀਕ ਹੈ ਪਰ ਲੇਖਾ ਸ਼ਬਦ ਇੱਕ ਜਗ੍ਹਾ ਹੋਰ ਵੀ ਹੋਰ ਸੈਂਸ ਵਿੱਚ ਵੀ ਵਰਤਿਆ ਜਾਂਦਾ ਜਿੱਥੇ ਲੇਖਾ ਮੰਗੀਏ ਜਿੱਥੇ ਹੋਰ ਸੱਚਾ ਨਿਸ਼ਾਨ ਲੇਖਾ ਲੇਖਾ ਹੀ ਹੈ ਨਾ ਆਖਰਾਂ ਵਿੱਚ ਤਾਂ ਲਿਖਿਆ ਜਾਊ ਠੀਕ ਹੈ ਪਰ ਉਹ ਇਹ ਆਪਣਾ ਲੇਖਾ ਲਿਖ ਰਿਹਾ ਇਹ ਚਿੱਤ ਲੇਖਾ ਲਿਖਿਆ ਹੋਇਆ ਸਤਪੁਰ ਦਾ ਲਿਖਾ ਇਹ ਪੜ੍ਹੇ ਇਹ ਜੀ ਪੜ੍ਹਦਾ ਉਹ ਆਪਣਾ ਲੇਖਣ ਨੂੰ ਜਿਹੜਾ ਪੜਾਇਆ ਹੋਇਆ ਕਿਸੇ ਨੇ ਪਬੁੱਤਰ ਉਹ ਲੇਖਾ ਵਰਦਾ ਉਹ ਲੇਖਾ ਲਿਖੀ ਜਾਂਦਾ ਮੈਂ ਤਾਂ ਪੁਰਨੋ ਹੋ ਗਿਆ ਮੇਤੇ ਪਾਪ ਹੋ ਗਿਆ ਪਰ ਜੀ ਇਹ ਲਿਖਿਆ ਹੋਇਆ ਪੜ ਲਵੇ ਫਿਰ ਉਹ ਬੰਦਾ ਹੀ ਨਹੀਂ ਨੂੰ ਆਏ ਨੂੰ ਉਹਦਾ ਫਿਰ ਹੁਕਮਾਂ ਦੇ ਵਿੱਚ ਚੱਲਦਾ ਠੀਕ ਹੈ ਜੀ ਪੁੱਛ ਨਾ ਸਕਿਆ ਕੋਈ ਹਰ ਦਰ ਸਦ ਟੋਈ ਆਪੂ ਤੁਗੇ ਸਦਾਈ ਤੋਂ ਇਹਨੂੰ ਹਰ ਦਰਗਾਹ ਦੇ ਵਿੱਚ ਹਾਂ ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ ਕਾਲ ਇਹਦਾ ਜਮਕਾਲ ਕੌਣ ਨੇ ਆ ਜਿਹੜੇ ਪੁੱਠੀਆਂ ਮੱਤਾ ਦੇਣ ਵਾਲੇ ਨੇ ਉਹ ਜੱਬ ਦੂਤ ਨੇ ਜਿਹੜੇ ਜਿਹੜੇ ਖੋਟੀਆਂ ਮੱਤਾ ਵਾਲੇ ਨੇ ਜਿਹੜੇ ਬਿਲਦੇ ਨੇ ਨਾ ਉਹ ਭੇਟਾ ਲੈ ਕੇ ਬਿਲਦੇ ਨੇ ਕੁਛ ਫਿਰ ਨਹੀਂ ਜੇ ਇਹ ਤਾਂ ਮਹਾਪੁਰਖੋਂ ਤੁਸੀਂ ਤਾਂ ਤੁਸੀਂ ਤਾਂ ਹੋ ਕੇ ਬਹਿੰਨੇ ਨੇ ਪਰ ਗੱਲ ਨਹੀਂ ਬੰਦੇ ਕਰਦੇ ਆਪਣੀ ਮਰਜ਼ੀ ਉਹਨੇ ਬਾਅਦ ਉਹ ਬੇਟਾ ਲੈ ਕੇ ਸਤਕਾਰ ਕਰਦੇ ਨੇ ਪਟਿਆਈ ਵੀ ਕਰਦੇ ਨੇ ਇਹ ਐ ਤਾਂ ਨਹੀਂ ਵੀ ਜਮਕਾਲ ਮਿਲਿਆ ਦੀ ਭੇਟ ਸੇਵਕ ਨਿਤ ਹੋਈ ਜਿਹੜਾ ਸੇਵਕ ਹੈ ਉਹਨੂੰ ਜਮਕਾਲ ਵੀ ਭੇਟ ਦੇ ਕੇ ਮਿਲਦਾ ਹੈ ਨਮਸਕਾਰ ਕਰ ਲਈ ਨਹੀਂ ਲਈ ਜੀ ਇਹ ਜਮਕੇ ਦੂਤ ਨੇ ਜਿਹੜੇ ਜਿਹੜੇ ਲੋਕਾਂ ਨੂੰ ਕਾਲ ਵਾਸ ਪੁੱਲਦੇ ਨੇ ਸਿੱਖਿਆ ਦੇ ਕੇ ਉਲਟੀ ਜਾਂ ਤਾਂ ਅੱਗੋਂ ਮਿਲਦੇ ਦੇਣਾ ਇਹ ਗੁਰਮਖਾਨ ਨੂੰ ਈਮੇ ਉਹ ਕੇ ਮਿਲਦੇ ਨੇ ਐਂ ਇੰਨੇ ਅਸੀਂ ਬੜੇ ਆ ਮੁਕਾਬਲਾ ਨਹੀਂ ਕਰਦੇ ਇਹਨਾਂ ਨਾਲ ਜਿਵੇਂ ਰਵਦਾਸ ਖੈਰਿਆ ਨਾ ਪੇਪਰ ਪ੍ਰਦਾਨ ਕਰੇ ਡਡੋਤ ਉਹ ਨੂੰ ਨਾਉਜ਼ ਕਰਦੇ ਨੇ ਪਰ ਕਹਿਣਾ ਨਹੀਂ ਬੰਦਦੇ ਕਹਿੰਦੇ ਨੇ ਹਾਂ ਤੁਸੀਂ ਠੀਕ ਹੋ ਅਸੀਂ ਗਲਤਾਂ ਛੱਡਦੇ ਨਹੀਂ ਪਰ ਮਲੇ ਦੇ ਦੇ ਭੇਟ ਸੇਵਕ ਦੇ ਤੋਈ ਸੇਵਕ ਬਣਦੇ ਨੇ ਵੀ ਅਸੀਂ ਮਹਾਰਾਜ ਤੁਸੀਂ ਬੜੇ ਹੋ ਅਸੀਂ ਤਾਂ ਸੇਵਕਾਂ ਤੁਹਾਡੇ ਐਵੇਂ ਕਹਿੰਦੇ ਨੇ ਜਾਓ ਕਹਾਂ ਚਲੇ ਗਏ ਉਹ ਕਿੱਥੇ ਜੀਏ ਤਾਂ ਬਹੁਤ ਔਖੀ ਗੱਲ ਹੈ ਇਹ ਜਿਹੜੇ ਕ੍ਰਿਸਤੀ ਆਸਨਰ ਕਿੱਥੇ ਵਸਦੀ ਗੱਲ ਹੈ ਇਹਦਾ ਬਹੁਤ ਮਾਂ ਪੁੱਛ ਨਹੀਂ ਖਬਰ ਪਰ ਇਹ ਕੋਈ ਕਦੇ ਐ ਹੋਦਾ ਹੈ ਸਿਰਾਂ ਕਹਿਣ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਦ ਤੁਣੀ ਦਰ ਵਜਦੇ ਮਿਲਿਆ ਹਰ ਪੂਰੇ ਗੁਰਦੇ ਮਹਿਲ ਪਾਇਆ ਕਿਹੜਾ ਮਹਿਲ ਆ ਨਾ ਪੂਰੇ ਗਿਆਨ ਨਾਲ ਹੁੰਦਾ ਹੋਰਿਕ ਤੇ ਜਾਵਰਦਾ ਮਹਿਲ ਇਹ ਤਾਂ ਉੱਤਰਕੁਟੀ ਨੂੰ ਮਹਿਲ ਕਹੀ ਜਾਂਦੇ ਨੇ 10 ਦੁਆਰੇ ਮਹਿਲ ਪੂਰੇ ਗੁਰਦੇ ਮਹਿਲ ਪਾਇਆ ਜਾਂ ਪੂਰਾ ਚਲਣਾ ਹੁੰਦਾ ਫਿਰ ਦਿਖਾਈ ਮਹਿਲ ਪਾਇਆ ਫਟ ਪ੍ਰਗਟ ਹੋਈ ਉੱਥੇ ਆ ਕੇ ਫਟ ਪ੍ਰਗਟ ਹੁੰਦੀ ਲੋਹ ਜਾਂਦੀ ਗਿਆਨ ਦੀ ਕਹਿਣਾ ਹੋ ਗਿਆ ਜਦ ਪ੍ਰਗਟ ਵੀ ਹੁੰਦਾ ਜਾਂ ਬੋਲਦਾ ਉਹ ਲੋਈ ਪ੍ਰਗਟ ਵੀ ਹੁੰਦੀ ਹੈ ਅਚਾ ਲੋਈ ਵੀ ਆਉਂਦਾ ਕਹੋ ਕਬੀਰ ਸੁਣੋ ਰੇ ਲੋਈ ਹੁੰਦੀ ਰਹੀ ਨਾ ਬਹੁਤ ਪ੍ਰਗਟ ਹੋ ਜਾਂਦੀ ਹੈ ਚਾਹਲ ਸੰਦੀ ਹੈ ਜਣ ਚਾਹਲ ਸੰਦੀ ਹੈ ਲੋਈ ਹੋਇ ਮੁੱਛੋ ਬਹੁਤ ਵਾਰ ਕਹਨੇ ਆ ਕਿ ਭਗਤ ਕਬੀਰ ਜੀ ਆਪਣੀ ਘਰ ਵਾਲੀ ਬਾਰੇ ਕਹਿ ਰਹੇ ਪ੍ਰਗਟ ਸੁਣੋ ਰੇ ਲੋਈ ਘਰ ਵਾਲੀ ਤਾਂ ਤਾਂ ਮਰ ਗਈ ਸੀ ਕੀ ਪਤਾ ਹੈ ਅੱਛਾ ਜਿਉਂਦੀ ਹੋਣੀ ਸੀ ਇਹਨਾਂ ਸੀ ਜਿੱਦੀ ਕਬੀਰ ਦੀ ਸੀ 80 ਸਾਲ ਤੋਂ ਬਾਅਦ ਬਾਣੀ ਲੱਗੀ ਨਿਰਾਕਾਰੀ ਲੋਈ ਦੀ ਗੱਲ ਕਰ ਰਹੇ ਆ ਨਾਲੇ ਸਰਦਾਰ ਦੀ ਲੋਈ ਤਾਂ ਕਾਲੀ ਹੁੰਦੀ ਹੈ ਠੀਕ ਨਹੀਂ ਔਰਤ ਨੂੰ ਵੀ ਕਹਿੰਦੇ ਆ ਦੀ ਘਰ ਦਾ ਨਾਮ ਸੀ ਆਹ ਬਣਾ ਲੈਂਦੇ ਨੇ ਇਹ ਦਾ ਨਾਮ ਬਣਾਈ ਨੇ ਮਾਤਾ ਕੀ ਵੀ ਤੇ ਉਹ ਇਹ ਵੀ ਕਹਿੰਦੇ ਆ ਵੀ ਆਪਣਾ ਕਬੀਰ ਜੀ ਦੇ ਲੜਕੇ ਦੇ ਨਾਮ ਕਮਾਲ ਸੀ ਕਿਉਂਕਿ ਉਹ ਪਜੋ ਪੁੱਤ ਕਮਾਲ ਲਿਖਿਆ ਹੋਇਆ ਹੋਰ ਬਚਾਰੇ ਕੀ ਕਰਦੇ ਨਾ ਪਿਆ ਕੁਛ ਪੁਛਤਾ ਦੱਸਣਾ ਸੀ ਲੋਕਾਂ ਨੂੰ ਠੀਕ ਹੈ ਉਹ ਗੁਣਵਾਚਕ ਨਾਮ ਹੈ ਉਹਨਾਂ ਦਾ ਇਹਨਾਂ ਨੇ ਸਰੀਰ ਨਾਲ ਜੋੜਤੇ ਨੂੰ ਠੀਕ ਹੈ ਜੀ ਨਾਨਕ ਅਨਹਦ ਧੁਨੀ ਦਰਵਾਜੇ ਮਿਲਿਆ ਹਰ ਸੋਈ ਨਾਨਕ ਆਨਾਦ ਤੋਂ ਨਹੀਂ ਦਰਵਾਜੇ ਤੇ ਦਰਵਾਜੇ ਉੱਥੇ ਆਨਾਦ ਪ੍ਰਗਟ ਵੱਜਦੇ ਮੇਰੇ ਹਰ ਸੋਈ ਉੱਥੇ ਮਿਲਿਆ ਤੇ ਤਾਂ ਆਹ ਕੁਝ ਹੈ ਕਿਹੜੇ ਤੇਰੀ ਲੋਈ ਦੀ ਗੱਲ ਕਰਦੇ ਨੇ ਇਦਾਂ ਹੀ ਸੰਤਾਂ ਨੇ ਚਲੋ ਜਏ ਜਾ ਨੇ ਆਪਣੇ ਟਕੋਹਲੇ ਜੇ ਕੇ ਬਸ ਪੂਰਾ ਕਰ ਲਿਆ ਕੋਈ ਐਟਵਾਤਾ ਪਿਛਲਾ ਚਲੋ ਵੀ ਕਰਕੇ ਕੁਝ ਸੰਦ ਜੋੜੇ ਰੱਖੀ ਗੁਰਬਾਣੀ ਨਾਲ ਥੋੜੀ ਬਹੁਤੀ ਚਾਹੀਦੀ ਰਹੇ ਭਾਈ ਗੁਰੂ ਸਾਡੇ ਕੋਈ ਕਰੋ ਉਹ ਕਰੋ ਜੇ ਦੀ ਕੋਣਾ ਦੀ ਬੁੱਧੀ ਕਰਦੇ ਰਹੇ ਉਹਨਾਂ ਨੂੰ ਸਮਝਾਉਣਾ ਮੁਸ਼ਕਲ ਹੈ ਕਿਉਂਕਿ ਉਹ ਮੰਨ ਚੁੱਕੇ ਆ ਜਿਹੜੀ ਸੰਗਤ ਨਾ ਉਸ ਗੱਲ ਨੂੰ ਹਾਂ ਜੀ ਉਹਨਾਂ ਨੂੰ ਪ੍ਰੋਬਲਮ ਉਹ ਵੀ ਉਹ ਸੰਤ ਉਹਨਾਂ ਦੀ ਪੜਾਈ ਹੋਈ ਆ ਕੋਈ ਨਹੀਂ ਜਿਹੜੇ ਇੰਟੈਲੀਜੈਂਟ ਬੰਦੇ ਨੇ ਆਪੇ ਬਣ ਲੈਣਗੇ ਹੌਲੀ ਹੌਲੀ ਬਦਲ ਜਾਂਦਾ ਕੋਈ ਵੀ ਲਕੀਰ ਜਿਹੜੀ ਜਦ ਪੈ ਜਾਂਦੀ ਹੈ ਨਾ ਸ਼ੀਸ਼ੇ ਤੇ ਤਾਂ ਬਿੜਦੀ ਓਖੀ ਹੁੰਦੀ ਹੈ ਪੱਥਰ ਤੇ ਲਕੀਰ ਪੈ ਵੀ ਓਖੀ ਬਿੜਦੀ ਵੀ ਓਖੀ ਆ ਫਿਰ ਬਿੜਦੀ ਵੀ ਓਖੀ ਲੋਕ ਜਿਹੜੀ ਗੱਲ ਨੂੰ ਫੜ ਲੈਣ ਦੇ ਨਾ ਹਤੇ ਫਿਰ ਛੁਰਦੀ ਓਖੀ ਹੁੰਦੀ ਹੈ ਹਾਂਜੀ ਹੁਣ ਇੱਥੇ ਜਿਹੜਾ ਪੂਰੇ ਗੁਰ ਤੇ ਮਹਿਲ ਪਾਇਆ ਲਿਖਿਆ ਇਹਨੂੰ ਆਪਾਂ ਮਹਿਲ ਪੜਾਂਗੇ ਕਿ ਮਹਿਲ ਪੜਾਂਗੇ ਮਹਿਲ ਮਹਿਲ ਲਿਖੋਈ ਆ ਉਹ ਉੱਥੇ ਮੁਹੱਲਾ ਕਹਾਂਗੇ ਮਹਿਲ ਕਹਾਂਗੇ ਅੱਛਾ ਉਹਨੂੰ ਆਪਾਂ ਮਹਿਲ ਕਿਉਂ ਨਹੀਂ ਕਹਿੰਦੇ ਮਹਿਲਾ ਪਹਿਲਾ ਮਹਿਲਾ ਕਹਦੇ ਕਹੀਏ ਮਹਿਲਾ ਹੁੰਦਾ ਉਥੇ ਮਹਿਲਾ ਜੇ ਕਹਾਂਗੇ ਮਹਿਲਾ ਔਰਤ ਨੂੰ ਕਹਿੰਦੇ ਨੇ ਅੱਛਾ ਜੀ ਸਿਰਫ ਉਸ ਗੱਲ ਕਰਕੇ ਆਪਾਂ ਇੱਥੇ ਮਹਿਲ ਦਾ ਪਤਾ ਹੀ ਹੈ ਕਿ ਮਹਿਲ ਜਿਹੜੀ ਹੈ ਉਹ ਇੱਕ ਬਿਲਡਿੰਗ ਦਾ ਵੀ ਨਾ ਹੋਗਾ ਬਿਲਡਿੰਗ ਹੁੰਦੀ ਹੈ ਮਹਿਲ ਔਰਤਾਂ ਦਾ ਮਹਿਲ ਹੁੰਦੀ ਉਹਦੀ ਉੱਥੇ ਪਲੇਖਾ ਲੱਗੂਗਾ ਮਹਿਲਾ ਕਹੇ ਤੇ ਹਾਂਜੀ ਉਹ ਲਿਖਿਆ ਵੀ ਇਹ ਕੁਝ ਹਿੰਦੂਆਂ ਦੀਆਂ ਕਿਤਾਬਾਂ 'ਚ ਕੀ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਨੂੰ ਜੀਵ ਇਸਤਰੀ ਮੰਨਿਆ ਤਾਂ ਹੀ ਮਹਿਲਾ ਲਿਖਿਆ ਆਪਣੇ ਆਪ ਨੂੰ ਜੀਵ ਇਸਤਰੀ ਕਿਹਾ ਤਾਂ ਥੋੜੀ ਹੈ ਇਹ ਤਾਂ ਮਹਿਲ ਹੈ ਨਹੀਂ ਉਹ ਤਾਂ ਠੀਕ ਹੈ ਪਰ ਇੱਥੇ ਤਾਂ ਮਹਿਲ ਆਪਾਂ ਨੂੰ ਪਤਾ ਕਿ ਮਹਿਲ ਜਿਹੜਾ ਹੈਗਾ ਇਹ ਪੁਰਸ਼ਵਾਚਕ ਸ਼ਬਦ ਹੈ ਜਦ ਅਸੀਂ ਮਹਿਲਾ ਪਹਿਲਾ ਦੂਜਾ ਕਹਿੰਦੇ ਹੋ ਵਾਸਤੇ ਆਵੇ ਫਿਰ ਦੂਜਾ ਨਹੀਂ ਆ ਸਕਦਾ ਫਿਰ ਕੋਈ ਆਊਗਾ ਫਿਰ ਦੂਜੀ ਆਊਗਾ ਠੀਕ ਹੈ ਤਾਂ ਆ ਨਹੀਂ ਆ ਸਕਦਾ ਫਿਰ ਫਿਰ ਤਾਂ ਕੋਈ ਆਊਗਾ ਜੇ ਜੋਤ ਵਾਸਤੇ ਆਉਂਗਾ ਆ ਸਕਦਾ ਨਹੀਂ ਜੇ ਜੋਤ ਵਾਸਤੇ ਆਉਂਦਾ ਫਿਰ ਪਹਿਲੀ ਆਊਗਾ ਦੂਜੀ ਆਊਗਾ ਆਪ ਇਹ ਵਾਸਤੇ ਆਇਆ ਵੱਖਰੇ ਵੱਖਰੇ ਹਿਰਦੇ ਨੇ ਪਹਿਲਾਂ ਸਾਰਿਆਂ ਦੇ ਅੱਛਾ ਵੱਖਰੇ ਵੱਖਰੇ ਸਿਰਿਆਂ ਦੇ ਵੱਖਰੇ ਵੱਖਰੇ ਹਿਰਦੇ ਨੇ ਵੱਖਰੇ ਵੱਖਰੀ ਜਗ੍ਹਾ ਗਿਆਨ ਪੈਦਾ ਹੋਇਆ ਵੱਖਰੀ ਵੱਖਰੀ ਜਗ੍ਹਾ ਪ੍ਰਗਟ ਹੋਇਆ ਗਿਆਨ ਸੇਵ ਇੱਕੋ ਹੀ ਉਸ ਸਾਈ ਕੋਈ ਜੀਜੇ ਜੀ ਉਹ ਤਾਂ ਲਿਖਿਆ ਜੋ ਤੋ ਹਾ ਹਾਂ ਜੋ ਤੋ ਹਾ ਜੁਗਤ ਸਾਈ ਸਾਈ ਕਾਇਆ ਫਿਰ ਪਲਟੀ ਹੈ ਕਾਇਆ ਜਿਹੜੀ ਹੈਗੀ ਨਾ ਉਹ ਕਾਇਆ ਨੂੰ ਅਸੀਂ ਉਹ ਕਹਿੰਦੇ ਹਾਂ ਹਾਂ ਮਤਲਬ ਮਹਲ ਠੀਕ ਹੈ ਜੀ ਬਾਹਰਲਾ ਸ਼ਰੀਰ ਭਾਇਆ ਹੈ ਨਾ ਹਾਂ ਜੀ ਉਹ ਕਾਇਆ ਕਹਿੰਦੇ ਠੀਕ ਹੈ ਜੀ ਇੱਥੇ 28ਵੀਂ ਪੌੜੀ ਦੀ ਸਮਾਪਤੀ ਹੈ ਜੀ ਹਾਂ ਜੀ